ਅਥ ਲੋਕਮੀਚਨ ਖੇਲ ਕਥਨੰ ਸੋਇਆ ਮਾਰ ਪ੍ਰਲੰਭ ਲਿਓ ਮੁਸਲੀ ਜਬ ਯਾਤ ਕਰੀ ਹਰ ਜੀ ਤਬ ਗਾਈ ਚੂਮਨ ਲਾਗ ਤਵੇ ਬਸਰਾ ਮੁਗ ਧੀਨ ਵਹ ਕੀ ਅਰਮਾਈ ਹੋਏ ਪ੍ਰਸੰਨ ਤਵੇ ਕਰੁਨਾਰ ਤੋ ਲੋਕਮੀਚਨ ਖੇਲ ਮਚਾਈ ਤਾਂ ਛਵ ਕੀ ਅਤ ਹੀ ਉਪਮਾਂ ਕਬ ਕੇ ਮਨ ਮੈਂ ਬਹੁ ਪਾਂਤਨ ਭਾਈ ਕਬਿਤ ਬੈਠ ਕਰ ਗੁਵਾਰ ਅੱਖੇ ਮੀਚੈ ਏ ਗੁਵਾਰ ਹੂੰ ਕੀ ਛੋੜ ਦੇ ਤਾ ਕੋ ਸੋ ਤੋ ਔਰੋ ਗਏ ਧਾਇ ਕੈ ਅੱਖਾਂ ਮੂਦ ਤਬ ਉਹੀ ਗੋਬ ਹੂੰ ਕੀ ਫੇਰ ਜਾ ਕੇ ਤਨ ਕੋ ਜੋ ਸਾਥ ਜਾਏ ਕੈ ਤੋ ਝਲ ਬਲ ਕੈ ਭਲਾਵੇ ਹਾਥ ਆਵੇ ਨਹੀਂ ਤੋ ਮਿਟਾਵੇ ਆਖੈ ਆਪ ਹੀ ਤੇ ਸੋ ਤੋ ਆਏ ਕੈ ਕਹਿ ਕਵ ਸ਼ਾਮ ਕੀ ਮਹਿਮਾਨ ਨ ਰਹੀ ਜਾਏ ਐਸੀ ਭਾਂਦ ਖੇਲਾ ਕਾਨ ਮਹਾ ਸੁਖ ਪਾਏ ਕੈ ਸੋਈਆ ਅੰਤ ਪੈ ਰਤ ਗ੍ਰੀਖਮ ਕੀ ਰਤ ਪਾਵ ਸਿ ਆਏ ਗਈ ਸੁਖਦਾਈ कान फिर बन बीथन मैं संग लए बछरे की अरुमाई बैठ तवै फिर मद गुफा गिर गावत गीत सवै मन पाई ता छबकी अति उपमा कबने मुखते जिम पाक सुनाई सूर्ठ सारंग ओ गुजरी ललतार भैरव दीपक गावे ਟੂ ਓ ਮੇਗ ਮਲਾਰ ਹਰ ਅਲਾਪਤ ਗੌਂਡ ਅ ਸੁਧ ਮਲਾਰ ਸੁਨਾਵੈ ਜੈ ਸ੍ਰੀ ਅਰਮਾਲ ਸ੍ਰੀ ਓ ਪਰਜ ਸੋ ਰਾਗ ਸ੍ਰੀ ਠਟ ਪਾਵੈ ਸ਼ਿਆਮ ਕਹਿ ਹਰ ਜੀ ਰਜ ਕਹਿ ਮੁਰਲੀ ਸੰਗ ਕੋਟ ਗਰਾਗ ਬਜਾਵੇ ਕਵਿਤ ਲਲਤ ਤਨਾ ਸ੍ਰੀ ਸੰਗ ਬਾਸਰੀ ਕਿਧਾਰ ਆਓ ਨ ਮਾਰਵਾ ਵਿਹਾਗੜਾਓ ਗੂਜਰੀ ਪਰਦੇ ਔਰ ਕਨੜਾ ਕਲਿਆਣ ਸੁਭ ਕੁੰਭਕ ਬਿਲਾਵਲ ਸੁਣੇ ਤੇ ਮੂਜਰੀ पर्व पलासी भीम दीपगो सो गौरी नाट ठाडो ध्रम छाये मैं सो गावै कान पूजरी ताते ग्रह त्याग ताकी सुन तुन श्रोणन मैं मै मृग दानी फिरत सो बन बन उजरी सोय्याम सीत पई ऋतु कात की मुन देव चढ़यो जल फैग्यो थोरो कान कनीरे के फूल तरे अर गावत बीन बजावत भोरों श्याम किदो उपमा ते की, की मनमद विचार कवित सो जोरो मैन उठ्यो जग कै तिन कै तन लेत है भेद मनो अह तो रो गोपी बासव्या भूत है मुगते सब भार न पूर्ण करयो इनुहु आत्माई करे के करयो तब तीर्थ गन्धर्व ते जिन कै सिच ਕਹੇ ਕਿ ਪੜੀ ਸਤਿ ਬੰਨ ਹੋਤੇ ਕਿ ਕਿਦੋ ਚਤੁਰਾਨਨ ਆਪ ਬਨਾਈ ਸ਼ਿਆਮ ਕਹੇ ਉਪਮਾ ਤਹਿ ਕੀ ਇਹ ਤੇ ਹਰੇ ਓਠਣ ਸਾਥ ਲਗਾਈ ਸੁਤਨੰਦ ਬਜਾਵਤ ਹੈ ਮੁਰਲੀ ਉਪਮਾ ਤਹਿ ਕੀ ਕਲ ਸ਼ਿਆਮ ਕਨੋ ਤਹਿ ਕੀ ਧੁਨ ਕੋ ਸੁਨ ਮੋਹੇ ਰਹਿ ਮਨ ਰੀਜਤ ਹੈ ਸੋ ਜਨੋ ਕਨੋ ਤਨ ਕਾਮ ਭਰੀ ਗੁਪਿਆ ਸਭੀ ਮੁਖ ਤੇ ਇਮ ਭਾਤਨ ਜਵਾ ਪਨੋ ਮੁਹ ਕਾਨ ਗੁਲਾਬ ਕੋ ਫੂਲ ਭਇਓ ਇਹ ਨਾਲ ਗੁਲਾਬ ਚ ਆਤਮਨੋ ਮੋਹਿ ਰਹੇ ਸੁਨ ਕਹਿ ਤੁਨ ਕੋ ਮ੍ਰਿਗ ਮੋਹਿ ਪਸਾਰਗੇ ਖਗ ਪੈ ਪਖਾ ਨੀਰ ਬਹਿਓ ਜਮਨਾ ਉਲਟੋ ਪਿਖ ਕਹਿ ਤਿਹ ਕੋ ਨਰ ਖੋਲ ਰੇ ਚਖਾ ਸਿਆਮ ਕਹਿ ਤਿਨ ਕੋ ਸੁਨ ਕਹਿ ਬਛਰਾ ਮੁਖ ਕਛ ਨਾ ਚੁਗੈ ਕਖਾ ਛੋੜ ਚਲੀ ਪਤਨੀ ਆਪਣੇ ਪਤ ਤਾਰਕ ਵੈ ਜਿਮ ਡਾਰਤ ਲਖਾ ਕੂਕਲ ਕੀਰ ਕੋ ਕੇ ਹਰੇ ਮੈਂ ਰਹੋ ਵੈ ਕਹਿ ਮਤਵਾਰੋ ਰੀਜ ਰਹੇ ਸਭ ਹੀ ਪੁਰ ਕੈ ਜਨ ਆਨਨ ਪੈ ਇਹ ਤੇਜ ਸਸੀ ਓ ਇਹ ਕੀ ਮੁਰਲੀ ਜੋ ਬਜਾਇ ਤੇ ਉਪਰ ਰਾਗ ਸਵੈ ਪੁਨਵਾਰੋ ਨਾਰਦ ਜਾ ਠਕੈ ਤੇ ਬੰਸਰੀ ਜੋ ਬਜਾਵਦ ਕਨਰਕਾਰੋ ਲੋਚਨ ਹੈ ਮ੍ਰਿਗ ਕੀ ਕਟਕੇ ਹਰੀਨਾਗ ਹੈ ਗਰੀਬ ਕਪੋਤ ਸੀ ਹੈ ਤਿਹ ਕੀ ਅਧਰਾ ਪੀਸੇ ਹਰੀ ਮੂਰਤ ਜੋ ਹੈ ਕੋਕਲ ਆਉ ਪਿਕ ਸੇ ਬਚਨਾ ਮ੍ਰਿਤ ਸ਼ਾਮ ਕਹੈ ਕਬ ਸੁੰਦਰ ਸੋਹੈ ਪੈ ਏ ਤੇ ਲਜਕੈ ਅਬ ਬੋਲਤ ਮੂਰਤ ਲੈਨ ਕਰੇ ਖਗਰੋ ਹੈ ਫੂਲ ਗੁਲਾਬ ਨਾ ਲੇਤ ਹੈ ਤਾਬ ਸਹਾਵ ਕੋ ਆਵ ਆਵੈ ਦੇਖੇ ਸਾਨੂੰ ਪੈ ਕਮਲਾਦਲ ਨਰਗਸ ਕੋ ਗੁਲ ਲज्जਤ ਹੈ ਕຸນ ਦੇਖ ਰਤਾ ਨੂੰ ਸ਼ਾਮ ਕਿਦੋ ਆਪਣੇ ਮਨ ਮੈਂ ਵਰਤਾ ਗਨ ਕਹ ਕਵਿਤਾ ਇਹ ਦੇਖਣ ਕੋ ਇਨ ਕਹ ਸੰਪੂਰਵ ਪਛਮ ਡੋਲੇ ਲਹੇ ਨਹਿਆਨੋ ਸੁਇਆ ਮੰਘਰ ਮੈਂ ਸਭ ਹੀ ਰੁਪਿਆ ਮਿਲ ਪੂਜਿਤ ਚੰਡ ਪਤੇ ਹਰਿ ਕਾਜੈ ਪ੍ਰਾਤ ਸਮੇ ਜਮਨਾ ਮਧਨਾਵਤ ਦੇਖ ਤਿਨੈ ਜਲਜੰਗ ਮੁਖ ਲਾਜੈ ਗਾਵਤ ਗੀਤ ਬਿਲਾਵਲ ਮੈਂ ਜੁਰਮਾਨ ਸਿਆਮ ਕਥਾ ਇਹ ਸਾਜੈ ਅੰਗ ਅਨੰਗ ਵਢਿਓ ਤਿਨ ਕੇ ਪਿਖ ਕਹਿ ਜਿਹ ਲਾਜ ਕੋ ਭਾਜਨ ਭਾਜੈ ਗਾਵਤ ਗੀਤ ਬਿਲਾਵਲ ਮੈਂ ਸਭ ਹੀ ਮਿਲ ਗੋਪਨ ਉਜਲਕਾਰੀ ਕਾਹ ਕੋ ਭਰਤਾ ਕਰਬੇ ਕਹਾ ਬਾੰਛਤ ਹੈ ਪਤਲੀ ਅਰ ਭਾਰੀ ਸਿਆਮ ਕਹਿ ਤਿਨ ਕੇ ਮੁਖ ਕੋ ਪਿਖ ਜੋਤ ਕਲਾ ਸਸਕੀ ਪੁਨਹਾਰੀ ਨਾਵਤ ਹੈ ਜਮਨਾ ਜਨਮੈ ਜਨਪੂਰ ਰਹੀ ਗ੍ਰਹਿ ਮੈ ਫੁਲਵਾਰੀ ਸੋਇਆ ਨਾਵਤ ਹੈ ਗੁਪੀਆ ਜਲਵੇਂ ਕੇ ਮਨ ਮੈਂ ਫਨਹੌਲ ਨਾ ਕੋ ਗੁਨ ਗਾਵਤ ਤਾਲ ਬਜਾਵਤ ਹੈ ਤਿਹ ਜਾਏ ਮੁਖ ਤੇ ਉਚਰਾਏ ਭਾਂ ਸਬੈ ਇਤਨੋ ਸੁਖ ਨਾ ਹਰੀ ਧੌਲਣ ਕੋ ਕਬ ਹੈ ਅਤੀ ਕੇ ਬਨਿਉ ਸਰਸੁੰਦਰ ਕੌਲਣ ਕੋ ਗੋਪੀ ਬਾਜ ਦੇਵੀ ਜੀ ਸੋ ਸਵੇਯਾ ਲੈ ਆਪਣੇ ਕਰ ਜੋ ਮਿਟਿਆ ਤੇ ਥਾਪ ਕਹੈ ਮੁਖ ਤੇ ਜੋ ਭਵਾਨੀ ਪਾਇ ਪਰੈ ਤੇ ਕੀ ਹਿਤ ਸੋ ਕਰ ਕੋਟ ਪ੍ਰਣਾਮ ਕਹੈ ਇਹ ਬਾਣੀ ਪੂਜਤ ਹੈ ਇਹ ਤੇ ਹਮ ਤੋ ਤੁਮ ਦੇਹੋ ਵਹਿ ਜੀ ਮੈ ਹਮ ਠਾਨੀ ਹਵੈ ਹਵਰੋ ਪਰਤਾ ਹਰ ਜੀ ਮੁਖ ਸੁੰਦਰ ਹੈ ਜੇ ਕੋ ਸਸਾਨੀ ਭਾਲ ਲਗਾਵਤ ਕੇਸਰ ਅਛਤ ਚੰਦਨ ਲਾਵਤ ਹੈ ਸਿਤਕੈ ਹੁਨ 达ਰਤ ਫੂਲ ਉਡਾਵਤ ਹੈ ਮਖਿਆ ਤੇ ਕੀ ਅਤਿ ਹਿਤ ਕੈ पटतु पंचामृत दक्षणा पान परदक्षणा देत महाचितकय बरबे कह कान उपाव करै मित हो सो तात किधो कितकै गोपीबाज देवी जू कबित दंतन श्रृगारनी पतत लोक तारनी सो संकट निवारनी के ऐसी तू शक्त है वेदने उद्धारनी सुरेन्द्र राजकारनी पै गौर जा की जागे जोत और है लोमईन न धरा मैं न ध्यान तारी ਤਾਰੀ पै कछु जैसे तेरे ज्योत बीच आनन जगत है ਹੈ से दिनेश मैं दीवान मैं सुरेश मैं सुपत महेश ज्योत तेर ये जगत है कवित बिनती करत सब गोपी कर जोर जोर सुन ले हो बिनती हमारी ए चंडका सूरत उ बारे ऊटपत ते उधारे चंड मुंड मुंड डारे ਦੀਜੈ ਮਾਗਿਓ ਦਾਨ ਵੈ ਪ੍ਰਤੱਖ ਕਹਿ ਮੇਰੀ ਮਾਈ ਪੂਜੈ ਹਮ ਤਮੈ ਨਾਹੀ ਪੂਜੈ ਸੁਤ ਗੰਡਕਾ ਵੈ ਕਰ ਪ੍ਰਸੰਨ ਤਾ ਕੋ ਕਹਿਓ ਸੀ ਗਰਮਾਨ ਦੀਨੋ ਵਹਿ ਵਰਦਾਨ ਖੋਲ ਰਾਰਣ ਕੀ ਮੰਡਕਾ ਦੇਵੀ ਦੀ ਬਾਜ ਗੋਪਨ ਸੋ ਸੁਈਆ ਵੈ ਪਰਤਾ ਅਬ ਸੋ ਤੁਮਰੋ ਹਰਦਾ ਰਹਿ ਦੁਰਗਾ ਤਿਨ ਦੀਨਾ ਸੋ ਤੁਨਿ ਸ੍ਰੋਨਨ ਮੈਂ ਸੁਨ ਕੈ ਤਿਨ ਕੋਟ ਪ੍ਰਣਾਮ ਤਵੈ ਉਠ ਕੀਨਾ ਤਾਂ ਛਬ ਕੋ ਜਸ ਉੱਚ ਮਹਾ ਕਵ ਨੇ ਆਪਣੇ ਮਨ ਮੈਂ ਫੁਨ ਚੀਨਾ ਹੈ ਇਨ ਮਨ ਕਾ ਨਰਮੈ ਔ ਜੋ ਪੈ ਰਸ ਕਾਨਰ ਕੇ ਸੰਗ ਭੀਨਾ ਸਵਿਆ ਪਾਇ ਪਰੀ ਤੇ ਕੇ ਤਬ ਹੀ ਸਭ ਭਾਂਤ ਕਰੀ ਬਹੁਤਾ ਹੈ ਵਿਡਾਈ ਹੈ ਜਗ ਕੀ ਕਰਤਾ ਹਰਤਾ ਹ ਦੁਖ ਹੈ ਸਭ ਤੂੰ ਗਣ ਗੰਧਰਵ ਮਾਈ ਤਾ ਛਵ ਕੇ ਅਤ ਹੀ ਉਪਮਾ ਕਬਨੇ ਮੁਖਤੇ ਭਾਗ ਸੁਣਾਈ ਲਾਲ ਪਈ ਤਬ ਹੀ ਗੁਪਿਆ ਗੁਣ ਬਾਤ ਜਬੈ ਮਨ ਬਾਛਤ ਪਾਈ ਲੈ ਵਰਦਾਨ ਸਭੈ ਗੁਪਿਆ ਹਤਿਆਨ ਕਹਿ ਮੰਦਰ ਨੇ ਆਈ ਗਾਪਤ ਕੀ ਸਭੈ ਮਿਲ ਕੇ ਇਕ ਹੋਇ ਕੈ પ્રસਨੈ ਸੋ ਦੇਤ ਵਧਾਈ ਪਾਤਨ साथ खरी तिन की उपमा कब ने मुख ते इम गाई मानौ पाए निसापति को सर मद खिरी कविया तुरत आई सुइया प्रात पै जमुना जल में मिल ठाए गई सब ही गोपिया मिल गावत गीत चली ते जा कर आनंद पा मन में गोपिया तब ही हुन कान चले ते जा जमुना जल को हुन जा जुपिया सो देख तवै भगवान कहे लह बोलो री कर हो ਹਾਥ ਚੀਰ ਹਰਨ ਕਥਨੰ ਸੁਵਈਆ ਨਾਵਨ ਲਾਗ ਜਬੈ ਗੁਪਿਆ ਤਬ ਲੈ ਪਟ ਕਾਣ ਚਰਿਓ ਤਰੂਪੈ ਤੋ ਮੁਸਕਿਆਨ ਲਗੀ ਮਦ ਆਪਨ ਕੋਏ ਪੁਕਾਰ ਕਰੇ ਹਰ ਜੂਪੈ ਚੀਰ ਹਰੇ ਹਮਰੇ ਛਲ ਸੋ ਤੁਮ ਸੋ ਠਗ ਨਾਹੇ ਕਿਦੋ ਕੋ ਹਾਥਨ ਹਾਥ ਸੋ ਸਾਰੀ ਹਰੀ ਦਿਗ ਸਾਥ ਰੋ ਹਮਰੋ ਤੁਮ ਰੂਪੈ ਗੋਪੀ ਬਾਜ ਕਾਣ ਸੋ ਸੁਵਈਆ श्याम कहो मुख ते गोपिया एकां सिखे तुम बात पली है नंद की ओर पगो तुम दिहो प्रहार्थ की ओर के नाम हली है चीर हरे हमरे छल सों सुन मार डरे तोय कंस बलि है को मर है हम को तुम रोन रिप तूर डरे जिम कौल कली है कानबाज गोपी सों सुइया कान कही तिन कोए बात ना दयौ पठौ निकरियो बिन तोको क्यों जल बीज रही छप छपकै तन काहे कटावत हो पै जोको नाम बतावत हो नृप को तेह को फुन नाहे कछु डर मोको केसन ते कह कह तब भी अग्नि मद ईधन ज्यों ओहे चोको स्वया रूख चरे हर धीर जकै मुख ते बात कहि ए तासो ਔਰ ਇਸ ਬਾਤ ਕਹੀ ਉਹਨੂੰ ਇਹ ਜਾਏ ਕਹੈ ਤੋਹਿ ਮਾਤ ਪਿਤਾ ਸੋ ਜਾਏ ਕਹੋ ਇਹ ਕਾਨ ਕਈ ਮਨ ਹੈ ਤੁਮਰੋ ਕਹ ਜਾਸੋ ਜੋ ਸੁਨ ਕੋ ਕਹੈ ਹਮ ਕੋ ਇਹ ਤੋ ਹਮ ਸਮਝੈ ਪੁਨਵਾਸੋ ਸਵਈਆ ਗਉ ਬਾਜ ਦਿਓ ਬਿਨਾ ਨਿਕ ਰੈ ਨਹ ਚੀਰ ਕਯੋ ਹਸ ਕਾਨ ਸੁਨੋ ਤੁਮ ਸੀਤ ਸਹੋ ਜਲ ਮੈ ਤੁਮ ਨਾਹਿਕ ਬਾਹਰ ਆਵੋ ਕੋਰੀ ਔਕਾਰੀ ਦੈ ਆਪਣੇ ਅਗਵਾ ਪਿਛਵਾ ਕਰ ਬਾਰ ਤਜੋ ਪਤਲੀ ਯਰ ਭਾਰੀ ਯੋ ਨਹਿ ਦਿਓ ਕਹੋ ਹਰਜੀ ਤਸਲੀਮ ਕਰੋ ਕਰ ਜੋਰ ਹਮਾਰੀ ਸੋਇਆ ਫੇਰ ਕਹੀ ਹਰਜੀ 300 ਰਿਦਕਾ ਇਹ ਬਾਤ ਸੁਨੋ ਤੂੰ ਮੇਰੀ ਜੋਰ ਪ੍ਰਣਾਮ ਕਰੋ ਹਮਰੋ ਕਰ ਲਾਜ ਕਾੜ ਸਵੇ ਤੂੰ 베ਰੀ ਬਾਰ ਹੀ ਬਾਰ ਕਹੋ ਤੁਮ ਸੋ ਮੋਹ ਮਾਨੋ ਸ਼ੀਗਰ ਕਿਦੋ ਏ 헤ਰੀ ਨਾ ਤਰ ਜਾਏ ਕਹੋ ਸਭ ਹੀ ਪਹਿ ਸਹੌ ਲਗਾਇ ਕਉਨ ਠਾਕੁਰ ਗੇਰੀ ਗੋਪੀ ਬਾਜ ਕਾਨ ਸੋ ਸਵਈਆ ਜੋ ਤੁਮ ਜਾਏ ਕਹੋ ਤਿਨਹੀ ਪਹਿ ਤੋ ਹਮ ਬਾਤ ਬਨਾਵ ਹੈ ਐਸੇ ਚੀਰ ਹਰੇ ਹਮਰੇ ਹਰਦੀ ਦੇਈ ਭਾਰਤੇ ਨਿਆਰੀ ਕਡੈ ਹਮ ਕੈਸੇ ਵੇਦ ਕਹੈ ਸਭ ਹੀ ਜਸਦਾ ਪਹਿ ਤੁਹੇ ਵੈਸੇ ਜਿਉ ਨਰ ਕੋ ਗਹਿ ਕੈ ਤਰੀ ਲਾਤਨ ਮੂਕਨ ਜੈਸੇ ਕਾਨਵਾਜ ਦੋਹਰਾ ਬਾਤ ਕਹੀ ਤਬ ਏ ਹਰੀ ਕਾਹੇ ਵਿਧਾਵਤ ਮੋਹੇ ਨਮਸਕਾਰ ਜੋ ਨਾ ਕਰੋ ਮੋਹੇ ਦੁਹਾਈ ਤੋਹੇ ਗੋਪੀ ਬਾਸਵਿਆ ਕਾਹੇ ਖਿਜਾਵਤ ਹੋ ਅਮਕੋ ਅਰਦੇਤ ਕਹਾ ਜਦ ਰਾਏ ਦੁਹਾਈ ਜਾਬਿਦ ਕਾਰਨ ਬਾਤ ਬਨਾਵਤ ਸੋ ਵਿਦ ਹੈ ਹਮ ਹੂ ਲਗ ਪਾਈ ਭੇਦ ਕਰੋ ਹਮ ਸੋ ਤੁਮ ਨਾਹਕ ਬਾਤ ਹੈ ਮਨ ਮੈਂ ਤੋਹਿਆਈ ਸਹੋ ਲਗੈ ਹਮ ਠਾਕੁਰ ਕੀ ਜੋ ਰਹਿ ਤੁਮਰੀ ਬਿਨ ਸੁਨਾਈ ਕਾਨ ਬਾਜ ਗੋਪੀਆ ਸੁਨ ਸੁਈਆ ਮਾ ਸੁਨ ਹੈ ਤਵ ਕਾ ਕਰ ਹੈ ਹਮਰੋ ਸੁਨ ਲਿਹੋ ਸਭੈ ਬ੍ਰਿਜਨਾਰੀ ਬਾਤ ਕਹੀ ਤੂੰ ਮੂੜਨ ਕੀ ਹਮ ਜਾਣਥੈ ਤゥム ਹੋ ਸਭ ਭਾਰੀ ਸੀਖ ਤੋ ਰਸ ਰੀਤ ਏ ਕਾਨ ਕਹੀ ਤੂੰ ਹੋ ਮੋਹ ਪਿਆਰੀ ਖੇਲਣ ਕਾਰਨ ਕੋ ਹਮ ਹੂ ਜੋ ਹਰੀ ਛਲ ਕੈ ਤゥム ਸੁੰਦਰ ਸਾਰੀ ਗੋਪੀ ਬਾਜ ਸੁਈਆ ਫੇਰ ਕਹੀ ਮੁਖ ਤੇਮ ਗੋਪਨ ਬਾਤ ਸੀ ਮਨ ਏ ਪਟਦੈ ਹੋ ਸੋਹੋਂ ਕਰੋ ਮੁਸਲੀ ਧਰ ਕੀ ਜਸ ਦਾ ਆਨੰਦ ਕੀ ਹਮ ਜੋ ਦਹਿਕੈ ਹੋ ਕਾਨ ਵਿਚਾਰ ਪਿਖੋ ਮਨ ਮੈਂ ਇਨ ਬਾਤਨ ਤੇ ਤੁਮ ਨਾ ਕਿਸ ਪੈ ਹੋ ਦੇਹ ਕਹਿਓ ਜਲ ਮੈਂ ਕਮ ਕੋ ਇਹ ਦੇਹ ਅਸੀਸ ਸਵੈ ਤੁੰ ਜੈ ਹੋ ਗੋਪੀ ਬਾਜ ਸਵਈਆ ਸੇਰ ਕਹੀ ਮੁਖਤੇ ਮਿਲ ਗੋਪਨ ਨੇਹ ਲਗੈ ਹਰ ਜੀ ਨਹਿ ਜੋਰੀ ਨੈਣਨ ਸਾਥ ਲਗੈ ਸੁਨੇਹੋ ਕਹਿ ਮੁਖਤੇ ਇਹ ਹਸਾਵਲ ਗੋਰੀ ਕਾਨ ਕਹੀ ਹਸ ਕੈ ਇਹ ਬਾਤ ਸੁਨੋ ਰਸ ਰੀਤ ਕਹੋ ਮਮਹੋਰੀ आंखन ਸਾਥ लगा ਟਕਵਾ पुन हाथन साथ लगा शुभ सोरी फेर कहि मुख दे गोपिया हमरे पड दे हो कहो नंद लाला फेर स्नान करै नहाए हां कह कह हम लोग ने आछन वाला जोर प्रणाम करो हम को कर बारवै जल ते तत्काला कान कहि हसकै मुख दे करौनी ढील देउ पट हाला ਮੰਤਰ ਸਭਨ ਮਿਲ ਇਹ ਕਰਿਓ ਜਲ ਕੋ ਤਾਜ ਸਭ ਨਾਰ ਕਾਨਰ ਕੀ ਬੇਨਤੀ ਇਹ ਵਿਚਾਰ ਸੁਈਆ ਦੈ ਅਗਵਾ ਪਿਛਵਾ ਆਪਣੇ ਕਰ ਪੈ ਸਭੀ ਜਲ ਤਿਆ ਹੈ ਕਾਨ ਕਹਿ ਪਾਏ ਭਰੀ ਬਹੁ ਬਾਰਨ ਔ ਬੇਨਤੀ ਬਹੁ ਪਾਂਤ ਕਰੀ ਹੈ ਦੇਹੁ ਕਹਿਓ ਹਮਰੀ ਸਰਿਆ ਤੂੰ ਜੋ ਕਰ ਕੈ ਛਲ ਸਾਥ ਹਰੀ ਹੈ ਜੋ ਕਹਿਓ ਮਨ ਹੈ ਹਮਸੋ ਆਤੀ ਸਭ ਸੀਤਾ ਸਾਥ ਥਰੀ ਹੈ ਕਾਨ ਭਾਜ कान कई हस बात न कह है हम जो तुम सो मन हो सब ही मुख चूमन देव कहो चूम है हम हूं तुम हूं गण हो हर तोरन देहो कहो सभी कुच नातर हो तुमको हन हो तब ही पट दियो सबए तुम रे ए झूठ नहीं सत कह जन हो सोइया ਫੇਰ ਕਹੀ ਮੁਖ ਤੇ ਹਰਦੀ ਸੁਨਰੀ ਇੱਕ ਬਾਤ ਕਹੋ ਸੰਗ ਤੇਰੇ ਜੋਰ ਪ੍ਰਣਾਮ ਕਰੋ ਕਰ ਸੋ ਤੁਮ ਕਾਮ ਕਰਾ ਉਪਜੀ ਜੀ ਮੇਰੇ ਤਉ ਹਮ ਬਾਤ ਕਹੀ ਤੁਮ ਸੋ ਜਬ ਘਾਤ ਬਣੀ ਸੁਠ ਔਰ ਅਕੇਰੇ ਦਾਨ ਲਹੈ ਜੀ ਕੋ ਹਮ ਹਸ ਕਾਨ ਕਹੀ ਤੁਮਰੋ ਤਨ ਹੈਰੇ ਕਬਿਓ ਬਾਜ ਦੋਹਰਾ ਕਾਨ ਜਬੈ ਗੋਪੀ ਸਵੈ ਦੇਖਿਓ ਨੈਣ ਨਚਾਤ ਵੈ ਪ੍ਰਸਾਨ ਕਹਿਣੇ ਲਗੀ ਸਵੈ ਸੁਦਾਸੀ ਬਾਤ ਗੋਪੀ ਬਾਜ ਕਾਨ ਸੋ ਕਾਨ ਬਹਿ ਕ੍ਰਮ ਥੋਰੀ ਤਮੈ ਤੂੰ ਖੇਲੋ ਨਾ ਘਰ ਕਾ ਹੋ ਨੰਦ ਸੁਣੈ ਜਸਦਾ ਤਵ ਤੈ ਤੇ ਤੁਮ ਕਾਨ ਭੈ ਹਰ ਕਾ ਹੋ ਲਗੈ ਨਹ ਜੋਰ ਪੈ ਤੁਮਨੇ ਲਗਾਵਤ ਹੈ ਬਰ ਕਾ ਹੋ ਲਿਹਿ ਕਹਾ ਇਨ ਬਾਤਨ ਤੇ ਰਸ ਜਾਣਤ ਕਾ ਅਜ ਹੂੰ ਲਰਕਾ ਹੋ ਕਬਿਤ ਕਮਲ ਸੇ ਆਨਨ ਕੁਰੰਗਣ ਸੇ ਨੇਤਰਨ ਸੋ ਕੀ ਪ੍ਰਭਾ ਮੈਂ ਸਾਰੇ ਭਾਵਨ ਸੋ ਭਰੀਆ ਰਾਜ ਤੈ ਗੁਪਿਆ ਪ੍ਰਸੰਨ ਪਈ ਐਸੀ ਪਾਂ ਚੰਦਰਮਾ ਚਰੇ ਤੇ ਜਿਉ ਬਿਰਾਜੈ ਸੇਤ ਹਰੀਆ ਰਾਸੀ ਕੀ ਬਾਤੈ ਰਾਸ ਰੀਤੀ ਕੇ ਪ੍ਰੇਮ ਹੂ ਮੈਂ ਕਹਿ ਕਭ ਸਿਆਮ ਸਾਥ ਕਾਂਹ ਜੂ ਕੇ ਖਰੀਆ ਮਦਨ ਕੇ हारन बनाए बे के काज मानो हित कह परोवत खै मोतन की लरया सोया काहे को कानजू काम के बाण लगावत हो तन के तन पाव है काहे को नेह लगावत हो मुस्कावत हो चल आवद सोह है काहे को पाग धरो तिरची अर काहे भरो तिरची तुम गओ है काहे बासुनी हर की जब री रीजसी सब ही ब्रिज ठाडी पई तर तीर तवै हरवे हरवे चल कै गजगामै वीर बने ते नेत्रण के जनमैन बनाए धरे ए धामै श्याम रसा रूपेक्त यौ जिम टूटत बाज सुधाजित तामै सोइया कामसे रूप कलानिद से मुख कीर से नाग कुरंग से नयनन वांचन से तन दारम दांत कपोत से कंठ सो को कुल बैन कान लग्यो कहने तिनसो हस कै कव श्याम सहायक तैनन मुहे लयो सभी ही मन मेरो सो पहो नचाए संग सैनन कान बढे रस के हिरिया सवी जल बीच अचानक हेरी सहो तुमे यशदा कहो बात की सारथ कहो ए जहा ਦੇਹੋ ਕਹੋ ਸਭ ਹੀ ਹਮਰੇ ਪਟ ਹੋਏ ਸਵੇ ਤੁਮਰੀ ਅਬ 체ਰੀ ਕੈਸੇ ਪ੍ਰਣਾਮ ਕਰੈ ਤੁਮ ਕੋ ਬਾਤ ਇਲਾਜ ਕਰੈ ਹਰ ਜੀ ਹਮ ਤੇਰੀ ਸੋਇਆ ਪਾਪ ਅਕਰਿਓ ਹਰ ਕੈ ਤੁਮਰੇ ਪਟ ਔ ਤਰਪੈ ਚੜ ਸੀਸ ਸਾਹਾ ਹੈ ਜੋ ਹਮ ਪ੍ਰੇਮ ਛਕੇ ਅਧਹੀ ਤੁਮ ਕੋ ਹਮ ਢੂਡ ਢੂੰਡ ਲਾਹਾ ਹੈ ਜੋਰ ਪ੍ਰਣਾਮ ਕਰੋ ਹਮ ਕੋ ਕਰ ਸੋ ਲਗੈ ਤੁਮ ਮੋਰੀ ਹੈ ਕਾਨ ਕਹੀ ਹਜ਼ ਬਾਤ ਸੁਨੋ ਚਾਰ ਪਈ ਤੋ ਵਿਚਾਰ ਕਹਾ ਹੈ ਸੰਖ ਕਰੋ ਹਮ ਤੇ ਨ ਕਛੂ ਵਰ ਲਾਜ ਕਜੂ ਜੀ ਮੈਂ ਨਹੀਂ ਕੀਜੈ ਜੋਰ ਪ੍ਰਣਾਮ ਕਰੋ ਹਮ ਕੋ ਕਰ ਦਾਸਨ ਕੀ ਬਿੰਤੀ ਸੁਨ ਲੀਜੈ ਕਾਨ ਕਹੀ ਹਸ ਕੈ ਤਨਸੋ ਤੁਮਰੇ ਮ੍ਰਿਗ ਸੇ ਦ੍ਰਿਗ ਦੇਖਦ ਜੀਜੈ ਡੇਰਨ ਲਾਹੇ ਕਰੈ ਤੇ ਤੂੰ ਰੋ ਕਛੂ ਨਾਹਿਨ ਦੋਹਰਾ ਕਾਨ ਜਬੈ ਪੜ ਨਾ ਦਇ ਤਬ ਗੋਪੀ ਸਭ ਹਾਰ ਕਾਨ ਕਹੈ ਸੋ ਕੀ ਜੀਐ ਈਨੋ ਇਹ ਵਿਚਾਰ जोर प्रणाम करो हर ਆਪਸ कर आपस में कह कह मुस्कानी श्याम लगी कहने मुखते सब ही गोपिया मिले अमृत वाणी हो प्रसन्न कहो हम पै कर बात कही तू सो हम मानी अंतर नाहे रहयो ए जा अब सोवली तुम जो मन भानी सोइया काम के बाण बनी वरछी भरते तन से दीर्घ सुंदर तेरे आनन है शशि सोवल कहे हर मोहे रह मन रंच घेरे ਕੋ ਤੂੰ ਸਾਥ ਕਰੀ ਬਿਨਤੀ ਜਬ ਕਾਮ ਕਰਾ ਉਪਜੀ ਜੀ ਮੇਰੇ ਚੁੰਮਨ ਦੇਹੋ ਕਹੋ ਸਭ ਜੀ ਮੁਖ ਸਹੋ ਹਮੈ ਕਾ ਹੈ ਨਹ ਡੇਰੇ ਸੋਇਆ ਹੋਇ ਪ੍ਰਸੰਨ ਸਭ ਰੁਬੀਆ ਮਿਲ ਮੋਨ ਲਈ ਜੋ ਕਾਰ ਕਹੀ ਹੈ ਜੋਰ ਹੁਲਾਸ ਵੜਿਓ ਜੀ ਮੈਂ ਗਿੰਤੀ ਸਰਤਾ ਮਗਨੇ ਬਹੀ ਹੈ ਸੰਕ ਛੁਟੀ ਦੂਹ ਮਨ ਤੇ ਹਸ ਕੇ ਹਰ ਤੋ ਇਹ ਬਾਤ ਕਹੀ ਹੈ ਬਾਤ ਸੁਨੋ ਹਮਰੀ ਤੁਮ ਮਹ ਕੋ ਨਿਧੀ ਆਨੰਦ ਆਜ ਨਹੀਂ ਹੈ ਸੋਇਆ ਤਾ ਫਿਰ ਬਾਤ ਕਹੀ ਉਹਨੂੰ ਸੁਨਰੀ ਹਰ ਜੂ ਪਿਕ ਬਾਤ ਕਹੀ ਸੁਨ ਜੋਰ ਹੁਲਾਸ ਬੜੇ ਹੋ ਜੀ ਮੈਂ ਗਿਨਤੀ ਸਰਤਾ ਮਗਨੇ ਬਹੀ ਅਬ ਸੰਕ ਛੁਟੀ ਏਨਕੇ ਮਨ ਕੀ ਤਬ ਹੀ ਹਸ ਕੈ ਏ ਬਾਤ ਕਹੀ ਅਬ ਸਤ ਭਇਓ ਹਮਕੋ ਦੁਰਗਾ ਵਰ ਮਾਤ ਸਦਾ ਇਹ ਸਤ ਸਹੀ ਸੋਇਆ ਕਾਣ ਤ ਕਰਕੇ ਤੈਨੂੰ ਸੰਗ ਪੈ ਪਟ ਦੇ ਕਰ ਛੋੜ ਦਈ ਹੈ गोई 71 तवै गुपिया सब चंड सराहत धाम गई है आनंद अति सो बढ़यो तिनके जीय शोकुमा लई है ज्यों अत मेघ परय धरपय धर ज्यों सब्जी शुभ रंग पई है गोपी बा चढ़ेल तन चंड का मातवें बर एह दयो तन दियो आज कौन हम मित दुर्गा आवे हे कृपा हम पर की ਓ ਕਨਨ ਕੋ ਬਹੁ ਦਿਵਸ ਸੋ ਦੇਖਣ ਦੀ ਜੀਐ ਗੋਪੀ ਬਾਜ ਦੇਵੀ ਜੂ ਸੋ ਸੁਈਆ ਚੰਦ ਕਿਰਪਾ ਹਮ ਪੈ ਕਰੀਐ ਹਮਰੋ ਅਤ ਪ੍ਰੀਤ ਹੋਏ ਕਨਈਆ ਪਾਏ ਪਰੈ ਹਮ ਤੁਮਰੇ ਹਮ ਕਾਨ ਮਿਲਾਇ ਮੁਸਲੀ ਧਰ ਭਈਆ ਯਾਈ ਤੇ ਦਇ ਸੰਘਾਰਨ ਨਾਮ ਕਿਧੋ ਤੁਮਰੋ ਸਭ ਹੀ ਜੁਗ ਗਈਆ ਤੋ ਪਾਏ ਪਰੀ ਤੁਮਰੇ ਜਬ ਹੀ ਤੁਮ ਤੈ ਏ ਪੈ ਭਰ ਪਈਆ ਕਬਿਤ ਦਇਤ ਕੀ ਮੇਰੇ ਦਸਾਦ ਸੇਵਕ ਕੀ ਵਰਤਾ ਤੂੰ ਕਹਿ ਕਾਲ ਸਿਆਮ ਆਦ ਅੰਤੂੰ ਕੀ ਕਰਤਾ ਬੀਜੈ ਵਰਦਾਨ ਮੋਹਿ ਕਰਤ ਵਿਨੰਤੀ ਤੋਹਿ ਕਾਨ ਬਾਰ ਦੀਜੈ ਦੋਖ ਦਾਰਦ ਕੀ ਹਰਤਾ ਤੂੰ ਹੀ ਪਾਰਬਤੀ ਅਸ਼ਟ ਦੇਵੀ ਤੂੰ ਤੂੰ ਰੂਪ ਛੁਦਾ ਤੂੰ ਹੀ ਪੇਠੂੰ ਕੀ ਭਰਤਾ ਤੂੰ ਰੂਪ ਲਾਲ ਤੂੰ ਸੇਤ ਰੂਪ ਪੀਤ ਤੂੰ ਤੂੰ ਰੂਪ ਧਰਾ ਕੋ ਹੈ ਤੂੰ ਹੀ ਕਰਤਾ ਸਵਿਆ वाहन सिंह पुजा अष्टा जे चक्र त्रिशूल गदा कर मैं बरछी सर ढाल कमान ने खंग धरे जो बर है बर मैं गोपिया सब सेव कर तहकी चित देत हम मैं तिह कह हर मैं पुन अक्षत तू पंचा मृत दीप दिलावत हार डरे घर मैं कवित तो ही को सुना है जाप तेरो ही जप है ध्यान तेरो ही तर है ना जप है काहू को ਤੇਰੋ ਗੁਣ ਗਹਿ ਹਮ ਤੇਰੇ ਹੀ ਕਹੈ ਹੈ ਫੂਲ ਤੋ ਹੀ ਪੈ ਡਰੈ ਹੈ ਸਭ ਰਾਖੈ ਤੇਰੇ ਮਾਨ ਕੋ ਜੈਸੇ ਵਰ ਦਿਨੋ ਹਮੈ ਹੋਏ ਕੈ ਪ੍ਰਸਾਨ ਪਾਛੈ ਤੈਸੇ ਵਰ ਦੀਜੈ ਹਮੈ ਕਾਹਨ ਸੁਰ ਗਿਆਨ ਕੋ ਦੀਜੀਐ ਬਿਬੂਤ ਕੈ ਬਨਾਸਪਤੀ ਦੀਜੈ ਕਹਿ ਦੋ ਮਾਲਾ ਦੀਜੈ ਮੋਥਨ ਕੈ ਮੁੰਦਰਾ ਦੀਜੈ ਕਾਨ ਕੋ ਦੇਵੀ ਬਾਸਵਈਆ ਤੋ ਹਸ ਬਾਤ ਕਹੀ ਦੁਰਗਾ ਹਮ ਤੋ ਤੁਮ ਕੋ ਹੈ ਹੋ ਪ੍ਰਸਾਨ ਸਭੈ ਮਨ ਮੈਂ ਤੁਮ ਸਤ ਕਹਿ ਹੋ ਨਹੀਂ ਝੂਠ ਕਹਿ ਹੈ ਕਾਨੈ ਕੋ ਸੁ ਹੋ ਤੁਮ ਕੋ ਹਮਸੋ ਸੁਖ ਸੋ ਅਖਿਆ ਭਰ ਲੈ ਹੈ ਜਹੋ ਕਹਿਓ ਸਭ ਹੀ ਤੁਮ ਡੇਹਿਰਨ ਕਾਨ ਬਹੈ ਬਰ ਕੋ ਤੁਮ ਪੈ ਹੈ ਕਬਿਓ ਬਾਜ ਦੋਹਰਾ ਹਵੇ ਪ੍ਰਸਾਨ ਸਭ ਬ੍ਰਿਜਪਦੂ ਤਹਿ ਕੋ ਸੀਸ ਨਿਵਾਏ ਪਰ ਪਾਇਨ ਕਰ ਬੇਨਤੀ ਚਲੀ ਗ੍ਰਹਿਣ ਕੋ ਧਾਏ ਸੋਇਆ ਆਪਸ ਮੈਂ ਕਰ ਜੋਰ ਸਭੈ ਗੁਪੀਆਂ ਚਲ ਧਾਮ ਗਈ ਹਰਖਾਨੀ रीज दयो हम को दुर्गा बर श्याम चली कहती ए बानी आनंद मत भरी मद सो सब सुंदर तामन को निज कहानी दान दयो दज हु बहुतो मन इच्छत है हर को हम जानी दोहरा समय पला एकात सव होवै कतर सब बाल अंग सवै गणन लगी कर कै बात रसाल सवैया कू कह हर को मुख सुंदर कू कह शुभ नाक बनयो कूह कह कटके हरिसी तन कंजन सो रिजकाहु गन्यो है नयन कुरंग से को बनय छब को कब श्याम है लोगन में जीव जीव बन्यो तिन के तन में तुम कान मन्यो है कान कोपे कला नि सो मुख रीज रही सभी ब्रिज बारा मोहे रहे भगवान उत इनहू दुर्गावर चेटक डारा कौन टिका और बिखाय तिह को अति जस श्याम उचारा जीव इकतर रहै तिनको इम टूट गै ज्यों मृणाल की तारा निहो लग्यो इनको हरसो अर निहो लग्यो हर को इन नारे चैन परय धो को नह दवै पल नवन जावत होत सुवारे श्याम पै भगवान इने बस दैतन के जेहि ते दल खेर दिखावत है जग को ਤਨothorਨ ਮੈਂ ਜਬ ਕੰਸ ਵਿਚਾਰੇ ਉਦ ਜਾਗਤ ਸ਼ਾਮਿਤ ਹੈ ਗੋਪੀਆ ਕਬ ਸ਼ਾਮ ਕਹੈ ਇਤ ਕਹੈ ਸੰਕਾਕੇ ਰੀਦ ਰਹੀ ਤੇ ਪੈ ਸਭ ਹੀ ਵਿਖ ਨੈਣਨ ਪੁਨ ਕਾ ਨਰਵਾਕੇ ਪ੍ਰੇਮ ਛਕੀ ਨ ਪਰੈ ਇਨ ਕੋ ਕਲ ਕਾਮ ਬਢਿਓ ਅਤਹੀ ਤਨਵਾਕੇ ਖੇਲੈ ਪ੍ਰਾਤਕ ਕਾਲ ਬਹਿ ਹਮ ਨਾਏ ਲਖੈ ਹਮ ਕਹਿ ਜਨ ਗਾਕੇ ਪ੍ਰਾਤ ਭਯੋ ਚੁਹਲਾ ਚਰੀ ਜਲ ਜਾਤ ਖਰੀ ਬਨ ਗਾਏ ਛਿਰਾਨੀ ਗੋਪ ਜਗੇ ਪਦ ਗੋਪ ਜਗਿਓ ਕਵ ਸ਼ਾਮ ਜਗੀ ਯਰ ਰਾਣੀ ਜਾਗ ਉਠੇ ਤਬ ਹੀ ਕਰੁ ਨਾਨਦ ਜਾਗ ਉਠਿਓ ਮੁਸਲੀ ਧਰਮਾਨੀ गोप गए उत नान करए एकान एक चले गोपिया निज कहानी सोइया बात कह रस की हंस गए नहि और कथा रस की को भाखै चंचल श्रीपत के अपने दिग मोहे तनै बतिया एहि आखै बात ना जानत हो रस की रस जानत सो नर जो रस गाखै प्रीत पड़ै कर प्रीत कड़ै रस रीतन चीज सुनौ